ਜਨ ਲਾਗਾ ਹਰ ਏਕੇ ਨਾਏ ਇਸ ਕੀ ਆਸਾ ਵਿਰਤੀ ਜਾਏ ਜਨ ਲਾਗਾ ਹਰ ਏਕੇ ਨਾਏ ਜਿਹੜਾ ਕੋਈ ਜਗਿਆਸੂ ਜਬੀਂ ਕੋ ਸਖਲਾ ਜਨ ਜਨ ਲਾ ਗਿਆਨ ਦੀ ਦਲਾ ਦੀ ਉਹਨੂੰ ਗਿਆਨ ਹੋ ਜਾਂਦਾ ਇੱਕ ਨਉ ਪੀਆ ਉਹ ਨਉ ਨੂੰ ਲਗੂਆ ਉਹ ਜਾਨੂ ਜਨ लागा हर एक ਨਾ ਹੀ ਜਿਹੜਾ ਕੇਵਲ नाम ਨੂੰ ਹੀ ਬੁਗਦਾ ਹੈ ਨਾਮ ਦੇ ਪਿੱਛੇ ਤੈ ਗਿਆ ਇਸਕ ਨਾਮ ਤੇ ਬਿਨਾ ਹੋਰ ਕੁਝ ਹੋਰ ਕਿਤੇ ਉਹਦਾ ਟਾਰਗੇਟ ਨਹੀਂ ਹੋਰ ਕੋਈ ਉਹਦੀ ਇੱਛਾ ਹੀ ਨਹੀਂ ਜਨ ਲਗਾ ਹਰ ਇੱਕ ਨਾ ਹੀ ਜਿਸकी ਆਸਰ ਆਸਰ ਲੱਤੀ ਜਾਏ ਇਹ ਗੱਲ ਬਾਰ ਬਾਰ ਪੂਰੀ ਨਾਮ ਹੋਵੇ ਹੋਰ ਕੋਈ ਵੀ ਆਸ ਪੂਰੀ ਹੋਵੇ ਕਿਸੇ ਦਿਨ ਨਾ ਹੋਵੇ ਕੋਈ ਜ਼ਰੂਰੀ ਨਹੀਂ ਕਿਉਂਕਿ ਉਹ ਆਸ ਕਰਦਾ ਸਾਨੂੰ ਰਾਈਟ ਨਹੀਂ ਨਾ ਤਾਂ ਬਿਨਾ ਕੋਈ ਵੀ ਆਸ ਕਰਦਾ ਸਾਨੂੰ ਰਾਈਟ ਇਹ ਆਦਮੀ ਨੂੰ ਰਾਈਟ ਜਨ ਹੋਇਆ ਨਾਮ ਦੀ ਆਸ ਕਰਦਾ ਇਕਰਾਮ ਦੀ ਜਿਹੜਾ ਇਹਸਾਸ ਪਿੱਛੇ ਪੈ ਗਿਆ ਜਨ ਲੱਗਾ ਹਰ ਇੱਕਾ ਨਹੀਂ ਕੇਵਲ ਨਾਮ ਦੇ ਜਿਹਨੂੰ ਭੁੱਖ ਲੱਗੀ ਆ ਆਸ ਰਖਦਾ ਕਿ ਨਹੀਂ ਮਿਲੇ ਜਿਸकी ਆਸਾਂ ਬਸਤੀ ਜਾਏ ਉਹਦੀ ਆਸ ਬਸਤੀ ਕਰ ਮੇਰੇ ਜੀਓ ਸਾਰੀ ਸ੍ਰਿਸ਼ਟੀ ਦਾ ਕਾਰਨ ਇਸ ਨਾਮ ਦੇਣ ਆਦਮੀ ਜੋ ਪ੍ਰੋਗਰਾਮ ਹੈ ਪ੍ਰੋਫੈਸਰ ਦਾ ਉਹ ਆ ਸਭ ਨੂੰ ਨਾਮ ਦੇਣਾ ਕੋਈ ਸਾਰੇ ਨਾਮ ਲੈ ਲਾ यार अपन अपने घर चलेगा अस्पताल खाली रहे अस्पताल गोची भीड़ ना रहे सारे तंदुरुस्त हो जाए डॉक्टर और अस्पताल के प्रबंधक हमेशा यही इच्छा रहती है कि बदतो बद मरीज ठीक हो गए घर चले काम छुट्टी ले लो ये मरीज है ये हो चोरी से कुछ होरे खाई जान ਉਹ ਕਬ ਗਰੀਸਾਨੀ ਅਰੇ ਹਸਤਾੜਾ ਲੈ ਗਏ ਨੀ ਕਰ ਲੈਣੀ ਬਿਮਾਰੀਆਂ ਖੁਦ ਹੀ ਪੈਦਾ ਕਰੀ ਨਾਲ ਉਹ ਗਲਤ ਹੈ ਐਸੇ ਆ ਛਾਵਾਂ ਰੱਖਣ ਜਿਹਦੇ ਨਾਲ ਹੋਂਬੇ ਵਧੇ ਐਸੇ ਮਤਲਬ ਸੋਚ ਹੋਵੇ ਜਿਹਦੇ ਨਾਲ ਬਿਮਾਰੀ ਠੀਕ ਨਾ ਹੋਵੇ ਉਹ ਗਲਤੀ ਹੋਈ ਗਰੀਸਾਨੀ ਜਿਹੜਾ ਹਰ ਇੱਕ ਹਰ ਲੋਕ ਦੀ ਇੱਛਾ ਰੱਖਦਾ ਜਨ ਲਾਗਾ ਹਰ ਇੱਕੇ ਨਾ ਜਿਹੜਾ ਵੀ ਜਨ ਇੱਕ ਨਾਮ ਦੀ ਇੱਛਾ ਰੱਖੇ ਕੇਵਲ ਇੱਕ ਨਾਮੇ ਵਗਦਾ ਰਹੇ ਨਾ ਜਿਸकी यादਾਂ ਵਰਤੀ ਜਾਏ ਇਹ ਤਾਂ ਗੱਲ ਹੈ ਗੁਰੂ ਘਰ ਦੀ ਇਹ ਗੱਲ ਦੇ ਪਿੱਛੇ ਗੱਲ ਕੀ ਕਹੀ ਕਿ ਉਹ ਵਾਲਿਆ ਵੀ ਹੋਰ ਕਿਸੇ ਨੇ ਜਿੱਦੂ ਜੋ ਗ੍ਰੰਥ ਨੇ ਉਹਨਾਂ ਦੇ ਮੁਤਾਬਕ ਕੇਵਲ ਆਮਗਿਆ ਸ਼ਿੰਤੋਂ ਸ਼ਿਵਜੀ ਤੋਂ ਆਖਿ ਸੇ ਹੋਰ ਤੋਂ ਇਹ ਮੁਕਤੀ ਬੱਗੀ ਉਹਨਾਂ ਨੇ ਜਵਾਬ ਦਿੱਤਾ ਮੁਕਤੀ ਸਾਡੇ ਵਾਸਤੇ ਹੈ। ਉਹਨਾਂ ਦਾ ਯਾਸ ਪੂਰੀ ਨਹੀਂ ਹੋਈ। ਜੋ ਉਹਨਾਂ ਨੇ ਦੇਵੀ ਦੇਵਤੇ ਮਾਰੇ ਹੋਏ ਨੇ ਉਹਨਾਂ ਨੇ ਆਖਿ ਸੇ ਨਾ ਪੂਰੀ ਨਹੀਂ ਕੀਤੀ। ਜੋ ਭਗਤਾਂ ਦੀ ਕੋ ਖੋਜੇ ਤਾਂ ਹੋਇਆ? ਉਹ ਤਾਂ ਕਹਿੰਦੇ ਅਸੀਂ ਤਾਂ ਮੁਕਤੀ ਢੋਲਦੇ ਹਾਂ ਸਾਨੂੰ ਤਾਂ ਬਣੀ। ਫਿਰ ਉਹਨਾਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਪੁੱਛ ਕੇ ਪੂਜਣ ਦੀ ਗੱਡਾ ਖੜਾ ਸੀ ਜਿਹੜੇ ਮੁਕਤੀ ਦੀ ਆਸ ਕੋਲੀ ਦੀ ਕਰਦੇ ਕਿਉਂ ਪੂਜਿਆ ਜਾਂਦਾ ਸੀ ਉਹਨਾਂ ਨੂੰ ਸਿਰਫ ਸਵਾਥੀਆਂ ਨੇ ਪੂਜਿਆ ਲਾਇ ਤੇ ਸਾਰਥਵਾਰਥ ਉਹ ਸਵਾਥ ਦੀ ਕਹਾੜੀਆਂ ਸਾਰੀ ਸਵਾਥ ਦੀ ਖੇੜ ਹੈ ਸਾਰੀ ਪਰਮਾਰਥ ਵਾਲੀ ਖੇੜ ਹੈ ਕੇਵਲ ਪਰਮਾਰਥ ਵਾਲੀ ਖੇੜ ਕੀ ਹੈ ਜਨ ਲਗਾ ਹਰੇਕ ਜੇ ਗੁਰਦਾਰੇ ਜਾਂਦਾ ਜੇ ਗੁਰਬਾਣੀ ਪੜ੍ਹਦਾ ਜੇ ਨਾਮ ਦੀ ਛੈ ਨਹੀਂ ਰੱਖਦਾ ਗੁਰਬਾਣੀ ਕੀ ਕਹਿੰਦੀ ਇਹਦੀ ਸਮਝ ਜੇਦੀ ਸਮਝ ਦੀ ਇੱਛਾ ਹੀ ਨਹੀਂ ਰੱਖਦਾ ਉਲ ਪੜ੍ਹਨਾ ਕੋਈ ਫਾਇਦਾ ਨਹੀਂ ਇਹਦਾ ਮਤਲਬ ਇਹ ਨਹੀਂ ਅਸੀਂ ਬਾਣੀ ਪੜ੍ਹਨ ਤੇ ਰਕਾਉਂਦੇ ਹਾਂ ਉਹ ਦਵਾਈ ਖਾਣ ਦਾ ਕੋਈ ਫਾਇਦਾ ਨਹੀਂ ਇਹਦੀ ਉਲਟ ਵੀ ਖਾ ਲੈਣੀ ਹੈ ਪਰਹੇਜ਼ ਦੀ ਕਰਨਾ ਇਹ ਮਾਤਰਾ ਦੀ ਹੀ ਖਾਣੀ ਇੱਕਦੇ ਖਾਣੀਆਂ ਕਦੇ ਖਾਣੀਆਂ ਹੋਈ ਦੀ। ਇਹ ਬੱਧ ਤਰੀਕੇ ਨਾਲ ਕੋਈ ਵੀ ਕੰਮ ਹੋਊਗਾ। ਉਹ ਜਿਹੜਾ ਕੰਮ ਸੀ ਨਾ ਉਹਦੇ ਨਿਤਨੇ ਮੋਰੇ ਬਣਾ ਲਿਆ। ਦੀਵਤਾ ਖਾ। ਪਰ ਆਹ ਨੇ ਜਿੰਨਤਰੇ ਜਿਹੜਾ ਨਿਤ ਨਾਲ ਲਾ ਲਿਆ। ਇਹ ਤਰੀਕਾ ਹੋ ਸਕਦਾ। ਜਨ ਲਾਗਾ ਰੇਟ ਹੈ ਨਾ ਹੁਣ ਇਹਦੇ ਚ ਨਾ ਕੋਈ ਟਾਈਮ ਬਾਉਂਡ ਹੈ। ਕੰਨ ਲੱਗਾ ਰਹੇ ਕਿ ਨਾ ਕੋਈ ਸਮਾਂ ਕਿਹੜੇ ਟਾਈਮ ਲੱਗਿਆ ਨਾ ਮਰਦੇ ਵੇਲੇ ਜਿਸ ਦੀ ਆਸਾਂ ਬਤੀਜਾਇਆ ਮਰਦੇ ਵੇਲੇ ਤਾਂ ਇਹ ਵੀ ਬਰੇਸ ਲੱਗਿਆ ਹੋਇਆ ਕਦੋਂ ਲੱਗਿਆ ਕਿੰਨਾ ਚਿਰ ਲੱਗਿਆ ਰਹਿਣਾ ਇਹ ਵੀ ਕੋਈ ਬਾਉਂਡਰੀ ਇਹ ਆਸਾ ਸਾਥ ਸਮਰੋਹ ਉਹ ਵਿਦੂ ਜਿਹੜਾ ਵਿਅਕਤੀ ਸਾਥ ਸਾਥ ਨਾਮ ਦੀ ਭੁੱਖ ਆਪਣੀ ਅੰਦਰ ਪੈਦਾ ਰੱਖਦਾ ਹੈ ਸਾ ਸਾਜ ਨੂੰ ਡੋਲਦੀ ਉਹ ਭੁੱਖ ਰਹਿੰਦੀ ਐ ਉਹਦੀ ਭੁੱਖ ਬਦਲਦੀ ਹੋਈ ਨਹੀਂ ਧਿਆਨ ਬਦਲਦਾ ਹੀ ਨਹੀਂ ਕੋਈ ਆਸ ਬਸੇ ਨਹੀਂ ਨਾ ਗੱਈਆ ਨਾ ਜਾਊਗੀ ਇਹ ਤਾਂ ਮਤਲਬ ਜਿਹੜੇ ਨੂੰ ਨਾਮ ਮਿਲਿਆ ਸੀ ਵਾਹ ਨੂੰ ਮਨਾਂ ਦੀ ਆਸ ਡੋਲਦੀ ਸੀ ਮਨਾਂ ਦੀ ਆਸ ਡੋਲਦੀ ਰਹੀ ਐ ਪਹਿਲੀ ਗੱਲ ਤਾਂ ਉਹਨੂੰ ਨਾਮ ਬਾਰੇ ਨਹੀਂ ਕੋ ਦੱਸੀ ਵੀ ਨਾਮ ਹੁੰਦਾ ਹੀ ਜੇ ਨਾਮ ਬਾਰੇ ਪਤਾਉਂਦੇ ਨਾਮ ਨਾਲ ਗੁਰਬਾਣੀ ਜੇ ਮਰ ਜਾਣਾ ਸੀ ਪਹਿਲੀ ਸਟੇਜ ਨਾਮ ਕੀ ਹੁੰਦਾ ਗੁਰਬਾਣੀ ਤੋਂ ਪਤਾ ਲੱਗਣਾ ਸੀ ਗੁਰਬਾਣੀ ਤੋਂ ਪੁੱਛਿਆ ਨਹੀਂ ਲੋਕਾਂ ਤੋਂ ਸੁਣਿਆ ਸਾਂਈਆਂ ਗੱਲਾਂ ਫਿਰਦੇ ਨਾਮ ਦੀ ਜਾਣਕਾਰੀ ਹੀ ਗੁਰਬਾਣੀ ਦੇ ਰੱਖੀ ਹੈ ਇਹ ਵੀ ਇੱਕ ਦੋਸ ਜਿਹਾ ਤਕੜੀ ਵਿਸ਼ਵਾਸ ਤੋਂ ਇਹ ਗੱਲ ਕਹਿ ਕੇ ਜਨ ਲਗਾ ਹਰੇ ਤੇ ਨਾਇਤ ਆਹ ਨਾ ਜੀ ਜਿਹੜਾ ਇੱਕ ਨਾਮ ਦੇ ਬਗਲਾ ਗਿਆਸ ਬਰਤੀ ਨਹੀਂ ਜਾਣੀ ਕੇ ਉਹਨੇ ਕਹਾ ਕਿ ਇੱਥੋਂ ਆ ਕੇ ਢੋਲਣਾ ਜਾਇਓ। ਕੋਈ ਇੱਕ ਕਹਾਣੀ ਸੁਣਾਉਂਦਾ ਹੁੰਦਾ ਸੀ। ਮੈਂ ਕਹਾ ਇੱਕ ਬਾਬਾ ਜੀ ਆਇਆ ਜੱਟ ਸੀਗਾ ਉਹ ਕਹਿੰਦਾ ਵੀ ਮੈਨੂੰ ਭੁੱਖ ਲੱਗੀ ਆ ਘਰੋਂ ਦੀ ਦੁਕਾਨਾ ਤਾਂ ਆਂਗਾ ਵੀ ਰੋਟੀ ਮੇਰੇ ਵਾਲੀ ਇਹਨੂੰ ਮੈਂ ਖਾ ਲੇ ਰੋਟੀ ਲੈ ਕੇ ਗਈ ਉਹ ਆ ਗਈ ਵੀ ਬੇੜਾ ਦੀ ਰੋਟੀ ਖਾਦੇ ਕੋਈ ਨਹੀਂ ਤੇ ਉਹ ਤਾਂ ਹੀ ਕਹਿ ਦਿੰਦਾ ਭੁੱਖਾ ਹੋਊ ਰੋਟੀ ਕੋਲ ਖਾ ਲਈ ਲੱਸੀ ਪੀ ਲਈ ਬਖਣੀ ਸੀ ਉਹ ਖਾ ਲਈ ਹੁਣ ਉਹ ਆਦਮੀ ਦੀ ਆਮ ਆਦਮੀ ਇੱਛਾ ਹੈ ਮਾਇਆ ਦੀ ਹੁੰਦੀ ਹੈ ਹੌਲਕਾ ਤੇ ਬਹੁਤ ਅਸੀਮਾਇਆ ਵਾਸਤੇ ਲੋਨਾਂ ਦਾ ਕੋੜਾ ਉਹਨੂੰ ਕਿਹਾ ਵੇ ਤੂੰ ਆ ਘਰ ਵਈ ਤਰਮ ਆਇਆ ਕਹਿਣਾ ਪਈ ਜਾਂ ਤੂੰ ਕੋੜਾ ਰੱਖ ਕੇ ਨਾ ਆਇਆ ਫਾਲਾ ਤੇਰਾ ਲੋਹੇ ਦਾ ਇਹ ਤੂੰ ਰੱਖ ਕੇ ਸੋਨਾ ਸੋਨਾ ਸੋਨਾ ਸੋਨਾ ਕਰੀ ਜਾਈ ਸੋਨੇ ਦਾ ਹੋਜੂਗਾ ਜਦ ਮੋਜ ਕਰੀ ਉਹਨੇ ਕਹਿੰਦਾ ਉਹ ਉਹ ਫਾਲ ਕੜਿਆ ਉਹ ਸੋਨਾ ਸੋਨਾ ਸੋਨਾ ਸੋਨਾ ਕਰੀ ਗਿਆ ਕੰਨ ਜੇ ਸੋਨਾ ਹੋਣਾ ਹੁੰਦਾ ਸਮਾਂ ਸੀ ਨਾ ਵਾਈ ਮੇ ਅਸੁਬਦੀ ਆਈ ਕੰਨ ਜੇ ਸੋਨੇ ਦੀ ਬਣਨਾ ਤਾਂ ਲੋਹਾ ਹੀ ਬਣ ਜਾ ਉਹ ਲੋਹਾ ਨਾ ਮੜਾ ਲਿਆ ਕੋਤੇ ਸੋਨੇ ਦਾ ਸੋਨਾ ਬਣਨ ਵਾਲਾ ਹੋਵੇ ਜਦ ਵਿੱਚਿਆ ਅਸੁਬਦੀਆਂ ਦਾ ਮੱਦੇ ਚਲਿਆ ਤੇ ਜਾ ਕੇ ਆਇਆ ਨਾ ਕਹੇ ਦੋ ਕਹੇ ਵੀ ਹਾਂ ਸੋਨਾ ਦੇ ਦਾ ਲੋਹਾ ਹੀ ਬਣ ਗਿਆ ਕਹਿੰਦਾ ਲੋਹਾ ਹੀ ਰਹਿ ਗਿਆ ਹਾਂ ਹੋਰ ਕੁਝ ਹੋ ਜੂ ਜੋ ਵੀ ਪੁੱਛਾਇਆ ਤਾ ਹੁਣੀਆਂ ਤਾ ਉਦਾਂ ਹੀ ਬਣੀਆਂ ਹੁੰਦੀਆਂ ਨੇ ਦੱਸਣ ਵਾਸਤੇ ਅਕ ਜਾਂ ਨਾਜ਼ਮੀਆਂ ਦੇ ਵਿੱਚ ਆਸ ਰੱਖਣੀ ਬਹੁਤ ਦੂਰ ਦਾ ਕੌਖੀ ਆ ਇਸ ਕੀ ਆਸਨਾ ਜਾਏ ਕਿਉਂਕਿ ਆਸ ਢੋਲ ਜਾਨੀ ਹੈ ਢੋਲਣ ਤੇ ਰੱਖੋ ਪ੍ਰਭੂ ਤਾਹੀ ਗਿਆ ਹੋਇਆ ਅਕ ਤੇ ਢੋਲ ਨਾ ਜਾਓ ਬਿਨਾਮ ਖੰਡੀ ਪੜਨਾ ਨਹੀਂ ਪੜਨਾ ਹਾਂਜੀ ਜਰੂ ਲਾਗਾ ਹਰ ਇੱਕੇ ਨਾਏ ਜਿਸ ਦੀ ਆਜ਼ਾਦ ਕਰੰਟੀ ਨਾਲ ਆਸ ਮਤਲਬ ਆ ਹੁੜੀ ਚਾਹੀਦੀ ਹੈ ਢੋਲਣਾ ਨਹੀਂ ਚਾਹੀਦਾ ਬਦੂ ਜੇ ਤਾਂ ਆਂ ਢੋਲ ਗਿਆ ਬੇ ਤਾਂ ਗਲਤੀ ਤੁਹਾਡੀ ਹੈ ਤੇ ਜੇ ਆਜ ਬਚੀ ਰਹੀ ਤੁਹਾਡੀ ਟਿਕੀ ਰਹੀ ਤੇ ਪੂਰੀ ਹੋਊਗੀ ਹੋਊਗੀ ਹਾਂ ਸੇਵਕੋ ਤੋਕੋ ਗੂਝ ਪਰਮਬਦ ਪਈ ਸੇਵਕੋ ਸ ਅਸਲ ਵਿੱਚ ਆਸ ਪੂਰੀ ਹੁਣ ਵੀ ਦੇਖਿਆਈਆ ਉਹ ਟੋਕੀ ਦੇਖਿਆ ਵੀ ਰੋਲਦਾ ਸਾਡੀ ਉਹ ਰੋਲਦਾ ਪੂਰੇ ਰੱਸੀ ਖਿੱਚ ਮਾੜੀ ਹੋਵੇ ਤਾਂ ਟੁੱਟ ਜਾਂਦੀ ਹੈ ਹਾਂਜੀ ਸੇਵਕੋ ਸੇਵਾ ਕਰਾਈ ਸੇਵਕੋ ਸੇਵਾ ਕਰਾਈ ਤੋਕੋ ਜਾਂਦਾ ਜੇ ਜਿਹੜਾ ਸੇਵਕ ਆ ਨਾਮ ਚਾਹੁੰਦਾ ਅਸਲ ਚ ਨਾਮ ਸੇਵਕੇ ਚਾਹੁੰਦਾ ਨਾਮ ਲੈ ਕੇ ਸੇਵਾ ਹੀ ਕਰੀਦੀ ਔਰ ਕੀ ਕਰੀਦੀ ਨਾਮ ਲੈ ਕੇ ਸੇਵਾ ਕਰਾਈਦੀ ਨਹੀਂ ਨਾਮ ਲੈ ਕੇ ਹੀ ਸੇਵਾ ਕਰੀ ਕਰੀਦੀ ਇਹ ਨਾਮ ਤੋਂ ਪਹਿਲੇ ਜੇ ਨਾਮ ਲਾ ਕੇ ਵੇਹੀ ਤਾਂ ਸੰਤ ਬਣ ਗਏ ਮਤਮ ਆ ਗਈ ਇਸ ਗੱਲ 'ਚ ਸੇਵਕ ਤਾਂ ajo ਬਣਿਆ ਸੇਵਕੋ ਸੇਵਾ ਬਣਾਈ ਸੇਵਕ ਨੂੰ ਮੌਜ ਮੰਗਦੀ ਸੇਵਾ ਮਿਲ ਗਈ ਸੇਵਾ ਮਿਲ ਗਈ ਕੋਈ ਆਦਮੀ ਸਾਰੀ ਜ਼ਿੰਦਗੀ ਕਿਸੇ ਆਸਤੇ ਬੈਠਿਆ ਪੜਿਆ ਉਹਨੂੰ ਉਹਦੀ ਡਿਊਟੀ ਮਿਲ ਜਵੇ ਸਿਲੈਕਟ ਹੋ ਜਵੇ ਹਾਂ ਉਹ ਕਾਰ ਸੇਵਾ ਵਾਲੇ ਕਹਿੰਦੇ ਬੇਕਾਰ ਸੇਵਾ ਉਹ ਕਾਰ ਸੇਵਾ ਦੀ ਬੇਕਾਰ ਸੇਵਾ ਉਹ ਪਰਪੰਖੀ ਕਹਿੰਦਾ ਨਾ ਅੱਲ ਦਾ ਆਇਆ ਜੋ ਪਰਪੰਖੀ ਆਉਂਦਾ ਇਹ ਤਾਂ ਮਹਾਰਾਜਾ ਪ੍ਰਭੰਤ ਤੇ ਬਾਕੀ ਸੇਵਾ ਸਭ ਪ੍ਰਭੰਤ ਅਸੀਂ ਸੇਵਾ ਉਹਦਾ ਨਾਮ ਰੱਖ ਲਿਆ ਆਪ ਸੇਵਕ ਕੋ ਸੇਵਾ ਵਾਂ ਆਈ ਅੱਗੇ ਕੀ ਹੈ ਜੇ ਜੂਝ ਪਰਮ ਪਰਮ ਪਦ ਭਾਈ ਇਤੋਂ ਪਤਾ ਲੱਗਦਾ ਨਾ ਉਹਨੇ ਉਹਨੂੰ ਬੁੱਝਿਆ ਨਾ ਪਰਮ ਪਾਇਆ ਦੋ ਚੀਜ਼ਾਂ ਦੀ ਲੋੜੀ ਸੇਵਾ ਕਦ ਰਹੇਗੀ ਜਿਹਨੇ ਹੁਕਮ ਨਹੀਂ ਬੁੱਝਿਆ ਪਰਮ ਵੀ ਨਹੀਂ ਮਿਲਿਆ ਉਹ ਸੇਵਾ ਕਰੇ ਨਹੀਂ ਸਕਦਾ ਉਹ ਸੇਵਾ ਉਹਦੀ ਉਹਨੇ ਹੋੜੇ ਕੀਤਾ ਨਾ ਸੇਵਾ ਰੱਖ ਲਿਆ ਪਰ ਦਾ ਨਾਮ ਸੇਵਾ ਰੱਖ ਲਿਆ ਪਰ ਦਾ ਨਾਮ ਸੇਵਾ ਰੱਖ ਗਈ ਗੱਡੀ ਖੁੱਝ ਗਈ ਆਹਦੀ ਇਹ ਜਿਹੜੀ ਢੂੰਗੀ ਖਾੜੀ ਤੇ ਸਿੱਖੀ ਗਰੀ ਆ ਇਹ ਨਾਲ ਲੋਕਾਂ ਦੀ ਗਰੀ ਆ ਜਿਹਨੂੰ ਗੁਰਬਾਣੀ ਸੇਵਾ ਦੀ ਮੰਦੀ ਉਹਨਾਂ ਨੇ ਕਹਿਤਾ ਸੇਵਾ ਅਸਲੀ ਸੇਵਾ ਛੁੱਟ ਗਈ ਅਸ ਜਿਹਨੂੰ ਨਾਮ ਗੁਰਬਾਣੀ ਨਿਮੰਦੀ ਉਹ ਨਾਮ ਲੈ ਲਿਆ ਅਸਲੀ ਨਾਮ ਛੁੱਟ ਗਿਆ ਨਕਲ ਇਹਨਾਂ ਦੇ ਕੋਲੇ ਨਕਲੀ ਸਿੱਖੀ ਕੋਲੇ ਅਸਲੀ ਹੈ ਦੀ ਸਿੱਖੀ ਦਾ ਹੱਗੇ ਨਾ ਕੋ ਨਕਲੀ ਆ ਉਹ ਨਕਲੀ ਸੋਨਾ ਸਾਰੇ ਜੋ ਨਕਲੀ ਨੇ ਹੈਗਾ। ਝਕਲੀ ਦੇ ਜਵਾਰਾ ਸਭ। ਅਸਲੀ ਨਹੀਂ ਹੈ ਗੁਰਬਾਣੀ ਵਾਲੇ ਕੋਲ। ਅਸਲੀ ਗੋਲ ਨਹੀਂ ਹੈ ਗੁਰਬਾਣੀ ਨਾਲੇ। ਅਸਲੀ ਗੋਣ ਵਾਲੀ ਹੁੰਦੀ ਨਾ। ਸਤੋ ਕਿਸੇ ਗੋਲ ਨਹੀਂ ਹੈ। ਦਰਬਾਰ ਕਿਸੇ ਗੋਲ ਨਹੀਂ ਹੈ। ਮੇਰੇ ਕੋਈ ਵੀ ਨਹੀਂ ਹੈ। ਫਿਰ ਇਹ ਗੁਣ ਤੇ ਪੰਜ ਸੱਤੇ ਹੀ ਹੈ ਜੀ ਨਾ ਗੋਲ। ਹਾਂਜੀ। ਸੇਵਕੋ ਸੇਵਾ ਬੜਾਈ ਇਹੋ ਕੋ ਬੁਝ ਪਰਮ ਪਦ ਹੁਕਮ ਬੁਝ ਕੇ ਪਰਮ ਪਰਮ ਪਦ ਹੀ ਸੇਵਾ ਹੈ ਪਰਮ ਪਦ ਕਹਿੰਦੇ ਨੇ ਉਹੀ ਸੇਵਾ ਸੇਵਾ ਪਰਮ ਪਦਵੀ ਜਿਹੜਾ ਸੇਵਾ ਕਰਦਾ ਉਹ ਤੋਂ ਉੱਚੀ ਤਾਂ ਪਦਵੀ ਹੋਣੀ ਜਿसरी ਨਾਨਕ ਸੇਵਕ ਆਪਣੇ ਸੇਵਕੋ ਜੇ ਵੜਿਆ ਜੇ ਵੜਿਆ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪਸ ਰੱਖੇ ਨੇ ਹੈ ਇਹ ਤਾਂ ਵੱਡਾ ਕੌਣ ਹੁੰਦਾ ਪਰਮ ਕੇ ਸੇਵਕ ਵਿੱਚ ਤੇ ਸੇਵਕ ਨੇ ਹੈ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਲੱਗ ਗਿਆ ਹੁਣ ਇਹ ਤੇ ਉੱਪਰ ਖਤਮ ਆ ਮੈਂ ਬਚਾ ਕੁਝ ਐਂਡ ਆ ਗਿਆ ਆਖਰੀ ਗੱਲ ਕਹਤੀ ਵਰਕਟ ਆ ਗਿਆ ਹੁਗੰੂ ਹੋ ਗਿਆ ਉਹ ਕਬੂਜ ਪਰਮ ਪਦ ਪਾਈ ਸੇਵਕੋ ਸੇਵਾ ਕਰਨ ਆਈ ਜੇ ਸੇਵਕ ਨੂੰ ਡਿਊਟੀ ਮਿਲ ਗਈ ਡਿਊਟੀ ਮਿਲ ਗਈ ਕਿ ਉਹ ਕਿਹਾ ਹਾਂ ਕੀ ਕਰ ਉਹਨੇ ਸੇਵਾ ਹੀ ਕਰਦੀ ਹੈ ਇਸ ਤੇ ਉੱਪਰ ਨਹੀਂ ਵਿਚਾਰ ਇਸ ਤੇ ਉੱਪਰ ਨਹੀਂ ਵਿਚਾਰ ਹੋਂ ਵਿਚਾਰ ਖਤਮ ਕੇ ਕਲਪ ਜ ਜਾ ਕੇ ਮਨ ਵਸਿਆ ਨਾ ਸ਼ਬਦ ਹੀ ਪ੍ਰਗਟ ਹੋ ਗਿਆ ਕੋ ਮੇ ਪੁਝ ਦਾ ਨਕਸ਼ਾ ਬਣ ਗਿਆ ਆਪੇ ਨਿਰੰਕਾਰ ਨਾਂ ਦਾ ਦਰਸ਼ਨ ਹੋ ਗਿਆ ਨਿਰੰਕਾਰ ਦਾ ਦਰਸ਼ਨ ਹੋ ਗਿਆ ਸਾਰਾ ਸੱਚ ਖੜਾ ਨਿਰੰਕਾਰ ਹੈ ਨਾ ਕਾਰ ਦਾ ਦੇਸ਼ ਹੈ ਨਾ ਕਾਰ ਦਾ ਦੇਸ਼ ਮਨ ਦਾ ਨਕਸ਼ਾ ਜਿਵੇਂ ਵਿੱਚ ਵਸਿਆ ਹੋਇਆ ਹੈ ਕਾਰ ਦੇ ਦੇਸ਼ ਤੇ ਰਹਿੰਦਾ ਹੈ ਨਾ ਕਾਰ ਦੇ ਨਾਲ ਗੱਲਾਂ ਕਰਦਾ ਨਾ ਕਾਰ ਦਾ ਬਲਾਏ ਬੋਲਦਾ ਹਰ ਦਰਗਾਹ ਕਿਆਂ ਬਾਤਾਂ ਹੋੜ ਤੋਂ ਵਿਚਾਰ ਕੀ ਹੋਊ ਇਹ ਸਿਪਕੇ ਤੋਂ ਵੱਡਾ ਕੋਈ ਪਦ ਰਾਜਾ ਤਾਂ ਹੈ ਨਹੀਂ ਰਾਜਾ ਪਰਮੈਸ਼ਰ ਦਾ ਰਾਜ ਤਾਂ ਸਾਧਕ ਦਾ ਤੇ ਇੱਥੇ ਤਾਂ ਸੁਰਗੇ ਹੋਰ ਕੋਣੂ ਐਥੇ ਕੌਣ ਆਉਗਾ ਓਏ ਰਾਜਾ ਛੱਡੋ ਇਹ ਤਾਂ ਨਰਕ ਦੇ ਰਾਜੇ ਨੇ ਉਹ ਨਰਕ ਦੇ ਰਾਜੇ ਨੇ ਸੁਰਗ ਦੇ ਰਾਜਾ ਸਵੈ ਕਰ ਦਾ ਰਾਜਾ ਨਰਕ ਦਾ ਵੀ ਰਾਜਾ ਸੁਰਗ ਦਾ ਵੀ ਰਾਜਾ ਚਾਹੇ ਨਰਕ ਦਾ ਸੁਰਗ ਦਾ ਸੇਵਕ ਹੈ ਨਰਕ ਦਾ ਰਾਜਾ ਅਸਲ ਜਿਹੜਾ ਸੇਵਕ ਹੈ ਨਰਕ ਦਾ ਰਾਜਾ ਅਸਲੀਏ ਹੈ ਕਿਉਂਕਿ ਵੱਡਾ ਤੇ ਭੂਪਤ ਜਿਹਨੇ ਪੱਟਾ ਤਨ ਐ ਰਾਜੇ ਨੇ ਦੂਰੇ ਨੇ ਛਤਰਪਤੀ ਰਾਜਾ ਭਗਤਪੁਰਾ ਬਹੁੜ ਨਾ ਕੋਈ ਭਗਤਪੁਰਾ ਬਹੁੜ ਨਾ ਕੋਈ ਪੱਟਾ ਦੂਰ ਛਤਰਪਤੀ ਪੱਟਾ ਦੂਰ ਛਤਰਪਤੀ ਰਾਜੇ ਛੜੇ ਨੇ ਨਰਕ ਦੇ ਵਿੱਚ ਆਪਣੇ ਬਣੇ ਬੈਠੇ ਵੱਡੇ ਭਗਤ ਹੁਕਮ ਆ ਜੀ ਇਹ ਦੱਸ ਰਿਹਾ ਵੀ ਹੁਕਮ ਆ ਹੈ ਆ ਕਮ ਆ ਇਸ ਵਕਤ ਕਰੋ ਆ ਨਾ ਕਰੋ ਕੁਰਾਨ ਇਹੀ ਗੱਲ ਕਹਿ ਰਹੀ ਹੈ ਕਿ ਜੋ ਫਰਦਾ ਕਹਿ ਰਿਹਾ ਤੁਹਾਨੂੰ ਜੋ ਕਥਾ ਭੇਜੀ ਸੀ ਪਹਿਲਾਂ ਮੁਸਲਮਾਨਾਂ ਨੇ ਕਹੇ ਤੁਸੀਂ ਉਹਦੇ ਅੰਸਾਰ ਕੰਮ ਨਹੀਂ ਕੀਤੇ ਜਾਣ ਨਹੀਂ ਕੀਤਾ ਤੁਹਾਡੇ ਤੇ ਗੁੱਸਾ ਬੜੀਆ ਤਾਂ ਤਾਂ ਤੁਹਾਡੇ ਮੁਸੀਬਤਾਂ ਪੈਂਦੀਆਂ ਨੇ ਜੋ ਗੁਰਵਾਨੀ ਦਾ ਸਾਡੇ ਕੋਲ ਮੈਸਜ ਆਇਆ ਹੈ ਕਿ ਅਸੀਂ ਉੱਥੇ ਨਹੀਂ ਚਲਾਂਗੇ ਮੁਸੀਬਤਾਂ ਪੈਣਗੀਆਂ ਹੋਰ ਵੀ ਪੈਣਗੀਆਂ ਪਿੱਛੇ ਵੀ ਜਿਹੜੀਆਂ ਇਹਨਾਂ ਤੇ ਮੁਸੀਬਤਾਂ ਪੈ ਜਾਣਾ ਜਦ ਗੱਟਿਆਂ ਲੱਗਿਆ ਦੇ ਵਿੱਚ ਰਾਜ ਖਾਲਸਾ ਜਮਾ ਜਿਆਦਾ ਫੜ ਗਿਆ ਤਾਂ ਗੁਰਮਤ ਛੁੱਟ ਗਈ ਸੀ ਉਦੋਂ ਤਦ ਉਹ ਕਹਿ ਰਿਹਾ ਉਹਦੇ ਵਿੱਚ ਕੋਪਰ ਵੀ ਖੋਟ-ਖੋਟ ਜਿਹੜੀ ਆ ਉਹ ਗਈ ਆ ਵੱਡੇ ਗੱਲੂ ਕਹਿੰਦੇ ਵੀ ਖੋਟ-ਫੋਟ ਛੜੀ ਆ ਅਸਲੀ ਖਾਲਸਾ ਹੁਣ ਆ ਉਹ ਖੋਟ ਖੜ ਗਈ ਖੋਟੇ ਗਈਆ ਉਹ ਖੋਟੇ ਆ ਸਾਰੀ ਹੁਣ ਸਾਡੇ ਚ ਭਰੀ ਹੋਈ ਇਹ ਜਾਣੇ ਵਾਲੀ ਉਹ ਚੀਜ਼ ਹੈ ਜਦ ਮਰਜੀ ਜਾਵੇ ਚਾਹੇ ਤਾਂ ਆਪੇ ਦਿਲੋਂ ਕੱਢ ਦੇਣ ਤੁਸੀਂ ਮੈਂ ਪਰਮੇਸ਼ਰ ਨਾਲ ਕੰਮ ਕਰ ਲਈਏ ਤਾਂ ਉਹ ਦੱਸੂਗਾ ਪਰਮੇਸ਼ਰ ਕੰਮ ਕਰ ਦੂਗਾ ਸਾਹਮਣੇ ਆ ਜੂਗੀ ਜਾਂ ਤਾਂ ਆਪ ਕੱਢ ਦੋ ਦਿਲ ਚੋਂ ਜੇ ਕੱਢ ਦਿੰਦਾ ਹੁੰਦਾ ਸੁਨਿਆਰ ਦੀ ਕੋਠੜੀ ਸਭ ਖੋਟ ਬਾਹਰ ਨਿਕਲ ਜਾਂਦੀ ਹੈ ਜਾਂ ਪੈਂਦੀ ਹੈ ਕੋਠੜੀ ਚ ਅਗਲਾ ਜਾਨੂੰ ਬੇ ਕੋਠੜੀ ਚ ਬਾਦੂ ਜਨਾਜ਼ਰ ਘੋੜਾ ਨਿਕਲਦੀ ਕੋਠੜੀ ਜਾਂ ਨੂੰ ਜਾਣਾ ਕਿਉਂਕਿ ਖੋਟੇ ਛਟੇਨ ਬਾਹਰ ਬਾਹਰ ਖੋਟੇ ਸਾਹ ਜਾਂਦਾ ਜਾ ਨਹੀਂ ਸਕਦੇ ਐਸੇ ਕੋਠੜੀ ਚ ਜੜਦੇ ਰਹੇ ਆ ਕ੍ਰਿਸ਼ਨ ਆਦਿ ਗੱਜੂ ਜੀ ਨੇ ਤੁਹਾਨੂੰ ਸਰਦਾਰੀਆਂ ਵੀ ਬਣ ਉਹ ਕੀੜੇ ਮਕੌੜੇ ਵੀ ਬਣਾ ਦਿੰਦਾ ਹਾਂਜੀ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਇਸ ਤੇ ਉੱਪਰ ਨਹੀਂ ਵਿਚਾਰ ਹੈ ਤਾਂ ਉੱਪਰ ਵਿਚਾਰ ਹੁਣ ਕਰਨ ਦੀ ਲੋੜ ਨਹੀਂ ਹੈ ਵਿਚਾਰ ਜੋ ਕਦ ਦਿੱਤੀ ਹੋ ਚੁੱਕੀ ਜਦੋਂ ਨਿਰੰਕਾਰ ਹੀ ਮਨ ਦੇ ਵਿੱਚ ਵਸ ਗਿਆ ਇਹ ਤਾਂ ਉੱਤੇ ਹਮ ਵਿਚਾਰ ਕੀਆ ਵਾਸਟ ਹੋ ਗਿਆ ਵਿਚਾਰ ਦਾ ਕੰਮ ਤਾਂ ਹੋ ਗਿਆ ਹਾਂ ਬੰਦਮ ਤੋੜ ਭਏ ਨਿਰਵੈਰ ਆਂਦਨ ਪੂਜੇ ਗੁਰ ਕੇ ਪੈ ਜਦ ਵੰਨਣਾ ਤੋੜ ਲੈ ਤੁਸੀਂ ਸੰਸਾਰ ਨਾਲ ਤੁਹਾਡਾ ਰਿਸ਼ਤਾ ਰਹਿ ਹੈ ਜੀ ਔਰ ਨਿਰਵਾਰ ਹੋ ਗਏ ਜਿੰਨਾ ਜਰ ਰੇਸ਼ਤਾ ਸੰਸਾਰ ਨਾਲ ਉਹਨਾਂ ਜਰ ਵੈਰ ਬੁਰਾ ਦਾ ਇਹ ਗੱਲ ਆ ਜਿੰਨਾ ਜਰ ਸਿੱਖ ਸਿੱਖ ਕਹਿੰਦਾ ਸੀ ਮੈਂ ਸਿੱਖਾਂ ਔਰ ਸਿੱਖਾਂ ਦਾ ਹੀ ਬੈਨੀਫਿਟ ਵਾਸਤੇ ਲੜਦਾ ਹਾਂ ਉਹਨਾਂ ਜਰੋ ਸਿੱਖ ਹੋਇਓ ਨਹੀਂ ਨਾ ਉਹ ਸਿੱਖ ਉਹਨਾਂ ਜਰੋ ਬੰਦ ਨਾ ਜਾਏ ਮਾਇਆ ਦੇ ਬੰਦ ਨਾ ਅਸਲ ਦੇ ਵਿੱਚ ਮਾਇਆ ਦੇ ਮਾਇਆ ਦਾ ਰਾਜ ਕਰਨਾ ਚਾਹੁੰਦਾ ਹੈ ਬਾਕੀ ਦਾ ਬਕਵਾਸ ਕਰਦਾ ਮੈਂ ਸਿੱਖਾਣਾ ਕਰਨਾ ਤੂੰ ਆਪਣਾ ਹੀ ਭਲਾ ਕਰਦਾ ਕਿਸੇ ਦਾ ਚੱਕੀ ਕਰਨਾ ਤਾਂ ਆਪਣੀ ਗੱਲ ਹੈ ਤੇਰਾ ਤਾਂ ਪਤਾ ਹੋਇਆ ਤੇਰਾ ਤਾਂ ਦਖਰਾਵ ਹੋ ਰਿਹਾ ਤੂੰ ਕਹਿੰਦਾ ਮੈਂ ਸਖੂ ਦੀ ਲੜਾਈ ਲੜਾਂਗੇ ਇਹ ਸਭ ਛਾਤਰਾ ਆਦਮੀਆਂ ਦੀਆਂ ਗੱਲਾਂ ਹੁੰਦੀਆਂ ਨੇ ਕਹਾਂ ਦੂ ਲੋਕਾਂ ਨੂੰ ਵੀ ਮਹਾਰਾਜੀ ਲੋਕ ਤੁਹਾਡੇ ਵਾਸਤੇ ਲੜਦਾਂ ਆਪਣੇ ਵਾਸਤੇ ਲੜ ਲੈ ਆਪਣੇ ਲੋਭ ਨਾਲ ਤਾਂ ਜਾਨ ਲੜ ਲੈ ਆਪਣੇ ਦੁਸ਼ਮਣ ਨਾਲ ਲੜ ਲੈ ਅੰਦਰ ਤੇਰੇ ਦਾ ਦੁਸ਼ਮਣਾਂ ਦੀ ਫੌਜ ਅੰਦਰ ਉਹਦਾ ਤਾਂ ਤੈਨੂੰ ਪਤਾ ਨਹੀਂ ਲੋਕ ਬੁਲਾਈ ਵਾਤੇ ਤੂੰ ਕੀ ਲੜ ਲੈਣਾ ਜਿਹਦੇ ਅੰਦਰ ਆਪਣੇ ਦੁਸ਼ਮਣਾਂ ਦਾ ਫੌਜ ਹੈ ਉਹਨਾਂ ਨਾਲ ਲੜ ਜੋਗਾ ਹੀ ਤੂੰ ਕਿਸੇ ਖਾਤਰ ਕੀ ਲੜ ਲੈਣਾ ਸਭ ਬਕਵਾਸ ਕਰਦੇ ਨੂੰ ਕੁਛ ਨਹੀਂ ਛਾਦਲ ਨੇ ਕਿਸੇ ਨਾ ਗਏ ਤਰੀਕੇ ਨਾਲ ਝੂਠ ਬੋਲ ਕੇ ਰਾਜ ਦੀ ਕੁਰਸੀ ਲੈਣੀ ਆਗੋ ਬਣਨਾ ਚੌਧਰੀ ਵੱਲ ਆ ਗੱਲਾਂ ਨੇ ਨਾਆਂ ਦੀਆਂ ਹੋਰ ਕੁਝ ਨਹੀਂ ਹੁੰਦਾ ਹਾਂਜੀ ਬੰਦਨ ਤੋੜ ਪਏ ਨਿਰਵੈਰ ਆਨੰਦ ਪੂਜੇ ਗੁਰਕੇ ਪਏ ਆਨੰਦ ਗੁਰਕੇ ਪਰ ਜਿਨ੍ਹਾਂ ਨੇ ਬੰਦਨ ਤੋੜਦੇ ਕੋਈ ਕੋਈ ਉਹਨਾਂ ਦਾ ਧਰਮ ਵੀ ਨਹੀਂ ਰਿਹਾ ਉਹਨਾਂ ਦਾ ਕੀ ਹੈ ਇੱਕ ਧਰਮ ਸੱਚ ਧਰਮ ਉਹਨਾਂ ਦਾ ਸਿੱਖ ਧਰਮ ਨਹੀਂ ਹੈ ਸੱਚ ਧਰਮ ਉਹਨਾਂ ਦਾ ਸਿੱਖ ਮਤ ਹੈ ਸਿੱਖ ਧਰਮ ਨਹੀਂ ਦੀ ਸਿੱਖ ਮਤ ਸਿੱਖਿਆ ਸਿੱਖਿਆ ਵਾਲੀ ਮਤ ਸਾਰਿਆਂ ਬਤਾ ਜੇ ਸਿੱਖਿਆ ਮਤਲਬ ਸਾਰਿਆਂ ਜੇ ਸਿੱਖਿਆ ਸਰਬ ਸੇਖ ਲਿਖਿਆ ਅਲੀਮਾ ਕਹਿੜੀਓ ਸਿੱਖ ਮਤ ਹੈ ਸਬਦ ਤੇ ਤੇਰੀ ਜਿਹੜੀ ਤੇਰੇ ਵਾਲੀ ਬੁੱਧੀ ਹੈ ਜਿਹੜੀ ਸਿੱਖਿਆ ਨਾਲ ਉਹ ਬੁੱਧੀ ਮਿਲੇ ਉਹ ਅਸਲੀ ਸਿੱਖਿਆ ਮੇਰੀ ਬੁੱਧੀ ਜਿੱਥੇ ਖਤਮ ਹੋ ਜਵੇ ਜਿਹੜੀ ਤੇਰੇ ਵਾਲੀ ਮੇਰੇ ਵਾਲੀ ਬੁੱਧ ਨੂੰ ਖਤਮ ਕਰ ਦੇ ਸਿੱਖਿਆ ਉਹ ਸਿੱਖਿਆ ਜਦ ਮੇਰੀ ਬੇਰੀ ਬੁੱਧ ਅਗਲੀ ਉਹ ਖਤਮ ਹੋ ਜੂਵੇ ਮੇਰੀ ਆਪਣੇ ਬੁੱਧ ਨੂੰ ਤਾਂ ਕੋਈ ਖਤਮ ਕਰਦਾ ਹੀ ਸਭ ਤੋਂ ਮਾਰੀ ਆਪਣੇ ਬੁੱਧ ਨਾਲ ਸਿੱਖੀ ਖਤਮ ਕੀਤੀ ਅਸੀਂ ਸਾਡੀ ਬੁੱਧੀ ਨੇ ਗੁਰੂ ਦੀ ਸਿੱਖਿਆ ਖਤਮ ਕਰਤੀ ਕਿਉਂ ਉਹਨੂੰ ਫਿੱਟ ਨਹੀਂ ਇਹ ਰਾਜ ਕਰਨਾ ਚਾਹੁੰਦਾ ਉਹ ਰਾਜ ਕਰਨ ਨਹੀਂ ਦਿੰਦੀ ਚੌਧਰੀ ਬਣਨਾ ਚਾਹੁੰਦਾ ਬਣ ਦਿੰਦੀ ਦਾਸ ਬਣਨਾ ਚਾਹੁੰਦਾ ਨਹੀਂ ਉਹ ਦਾਸ ਬਣਾਉਂਦੀ ਹੈ ਉਹ ਕਹਿੰਦਾ ਇਹਨੂੰ ਖਤਮ ਕਰੋ ਬੰਦਨ ਕਾਟ ਪਏ ਬੰਦਨ ਤੋੜ ਪਏ ਨਿਰਵੈ ਤੋੜ ਪਏ ਦਰਵਾਰ ਆਂਦਨ ਕੁੱਝੇ ਗੁਰੂ ਦੇ ਹੋ ਗਿਆ ਤੇ ਰਾਜਨੀਤਿਕ ਕਰਨਾ ਹੋਈ ਇਹਨਾਂ ਕਰਨਾ ਇਹਨਾਂ ਦੇ ਤਾਂ ਵੈਰੀਓ ਬੈਰੀ ਨੇ ਸੁਣੇ ਤੋਂ ਉਹ ਕਹਿੰਦਾ ਬੰਦਨ ਤੋੜ ਪਏ ਦਰਵਾਰ ਤਾਂ ਜੇ ਪੂਜੇ ਗੁਰੂ ਦੇ ਤਾਂ ਜੇ ਨਰਵਾਰ ਨਹੀਂ ਹੋਇਆ ਗੁਰ ਕੇ ਪੈਰ ਪੂਜੇ ਨਹੀਂ ਸਕਦਾ ਕਿਹੜੇ ਗੁਰ ਕੇ ਪੈਰ ਪੂਜਣੇ ਨੇ ਸਤਗੁਰ ਦੇ ਪੈਰਾਂ ਦੇ ਨੇੜੇ ਜਾਨਾ ਪਹਿਲਾਂ ਬੰਦਨ ਤੋੜ ਕੇ ਨਰਵਾਰ ਹੋ ਵੀ ਢੇੜੇ ਵੀ ਨਹੀਂ ਆਉਣ ਦਿੰਦਾ ਉਹ ਜਗੂ ਜੀ ਥੋੜੀ ਤਾਂ ਤਾਂ ਐਂਟਰੀ ਹੋਣੀ ਹੈ ਬੜੇ ਸਿੱਖਾਂ ਦੀ ਅਦੇਖੋ ਕੀ ਲਿਖਿਆ ਹੋਇਆ ਬਦਨ ਤੋੜ ਭਏ ਦਰਬਾਰ ਤਾਂ ਕਿਤੇ ਜਾ ਕੇ ਗੁਰ ਕੇ ਚਰਨਾਂ ਦੀ ਪੂਜਾ ਦੀ ਆਗਿਆ ਮਿਲੂਗੀ ਨਹੀਂ ਢੇੜੇ ਵੀ ਜਾਣਣਾ ਕਿਸੇ ਕੋ ਖੋਟੇ ਦਾ ਬਾਹਰ ਸੜ ਦੋਦੇ ਨੇ ਉਹ ਨਾ ਜੇ ਖੋਟਿਆਂ ਬਾਹਰ ਫੈਂਕ ਦੇਣਾ ਅਗਲੇ ਵਿੱਚ ਕੇ ਐਂਟਰੀ ਉਹ ਨਹੀਂ ਉਹ ਦੇਸ਼ 'ਚ ਐਂਟਰੀ ਨਹੀਂ ਉਹ ਦੇਸ਼ 'ਚ ਐਂਟਰੀ ਨਹੀਂ ਅੰਦਰ ਪੂਜਾ ਗੁਰਦੇ ਪੈਰ ਗੁਰਦੇ ਪੈਰ ਤਾਂ ਕਿਹਦੇ ਗੁਰਦੇ ਪੈਰਾਂ ਦੀ ਪੂਜਾ ਦਾ ਤੁਹਾਨੂੰ ਆਗਿਆ ਬਣੂਗੀ ਤਾਂ ਗੁਰਕੇ ਚਰਨਾਂ ਦੇ ਨੇੜੇ ਜਾ ਸਕੋਂਦੇ ਜੇ ਦਰਵੈਰ ਹੋ ਜਾਂ ਉਹ ਦੁਰਦੋ ਬੈਰ ਕੋਲ ਨਾ ਭਰੇ ਭਿਆ ਹਾਂਜੀ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਆਪੇ ਮਿਲੇ ਇਹ ਲੋਕ ਸੁਖੀ ਐਸ ਲੋਕ ਚ ਸੁਖਾ ਜਿੰਨੂ ਐਸ ਲੋਕ ਦੇ ਵਿੱਚ ਸੁਖ ਹੋਵੇ ਰਾਜ ਤੇ ਲੈਣਾ ਕੀ ਹੈ ਉਰਗਲਰ ਅਸਲ ਰਾਜਹੀ ਹੈ ਕਿ ਅਸਲ ਰਾਜ ਹੈ ਲੋਕ ਸੁਖੀ ਪਰ ਲੋਕ ਸਹਿਲੇ ਇਹ ਇਹ ਆ ਦਰਬਾਰ ਮੰਨ ਤੋੜ ਪੈ ਦਰਬਾਰ ਇਹ ਅਸਲੀ ਰਾਜ ਹੈ ਸਹਿਲ ਅਸਲੀ ਰਾਜ ਹੈ ਇਹ ਅਬਨਾਸ਼ੀ ਰਾਜ ਹੈ ਇਹ ਲੋਕ ਸੁਖੀ ਪਰ ਲੋਕ ਜ਼ਹਿਲੇ ਲੋਕ ਆ ਲੋ ਜੀ ਸੁਖੀ ਪਰ ਲੋਕ ਜ਼ਹਿਲੇ ਜਿਹੜਾ ਰਾਜ ਇਹ ਮੰਗਦੇ ਨੇ ਉਥੇ ਅਸਲ ਸਿਸਕੋ ਰਾਜਾ ਜੀ ਉਹ ਤਾਂ ਸੁਖੀ ਆ ਰਾਜਾ ਛਾਤ ਰਾਜਮ ਨੇ ਕਿਵੇਂ ਪੱਟੀ ਮਾਰ ਕੇ ਅੱਗੇ ਹੋ ਗਏ ਬਿਦਲ ਕਹਿੰਦਾ ਗੁਰਦਖ ਲਈ ਮੋਰੀ ਜਿੱਤਬਰਕ ਪੜਦਾ ਹੈ ਚੋਰੀ ਇਹ ਜੋਰੀ ਇਹਨਾਂ ਦਾ ਮਰਗ ਮਣ ਕਿਵੇਂ ਆਕੂ ਬਣ ਗਿਆ ਕਿਵੇਂ ਲੀਡਰ ਬਣ ਗਏ ਕਿਵੇਂ ਇਹਨਾਂ ਨੇ ਰਾਜਪੂਤਾਂ ਬਣਾਇਆ ਨੇ ਛਾਤਰਾ ਨੇ ਇਹ ਉਦੋਂ ਤੋਂ ਬੂਰੇ ਹੋਏ ਨੇ ਬੰਦੇ ਬਾਹਰ ਬੜੇ ਤੇ ਹੁਣ ਫੜੇਗਾ ਕਰਤਾਂ ਤੇ ਕਰਤਾਂ ਦੇ ਥੱਲੇ ਦੇ ਪਾਸੋਂ ਫੜੇ ਨੇ ਉਧਰ ਦੇ ਨਹੀਂ ਫੜੇ ਆਹ ਇਹ ਥੱਲੇ ਦੇ ਪਾਸੇ ਤੇ ਕਰਤਾਂ ਤੋਂ ਫੜੇ ਤਾਂ ਕਬੂ ਹੁੰਦਾ ਸਾਥ ਹੁੰਦਾ ਚਾਰ ਵੀਰਾਂ ਦਾ ਦੱਸਣਾ ਆਹ ਛੱਡਣੇ ਬਾਕੀ ਬੋਰਦੇ ਜੇ ਉੱਤੋਂ ਫੜੇ ਵੀ ਛੱਡ ਕੇ ਪਿੱਛੇ ਫੇਫੜ ਲੰਦਾਂ ਵਾਹਂ ਸੰਦਨ ਪੂਜੇ ਗੁਰਕੇ ਪੈਰ ਸੰਦਨ ਪੂਜਣ ਦੀ ਆਗਿਆ ਮਿਲਦੀ ਹੈ ਇਹੋ ਨਾਲ ਗੁਰਕੇ ਸਾਥ ਕੇ ਆ ਗੁਰਕੇ ਚੱਲਣਾ ਹੈ ਨਾ सारा समर्पण है ना दे दे मतलब अपने आप नु शब्द लो मन बेचे गुर के पास सतगुर के पास है। हाँ। लोग सुखी है पर लोक सहेले नानक हर, हर आपे में सुखी है ऐस लोक तो सुखी हो जब तक पर लोक सहेले हो जब तक नानक हर प्रभु हर प्रभु नाम है ले ਉਹ ਬੇਮੈ ਲੰਨ ਉਹਨੇ ਆਪੇ ਮਿਲਨੇ ਇਹਦਾ ਮਤਲਬ ਆ ਉਹਦੀ ਅੰਗਿਆ ਨਾਈਟਰੀ ਹੋਈਆ ਆ ਕੇ ਫਰ ਕੇ ਮੈਂ ਪੁੱਛ ਲੈਣ ਕਿ ਵੀ ਹਟਲਾ ਦੇਣਗੇ ਕੋਈ ਲਾਦੂਗਾ ਤਾਂ ਨੇੜੇ ਆਉਂਦਾ ਦੂਰ ਉਹਦੀ ਅਗਿਆ ਬਣਾ ਨਹੀਂ ਆਉਂਦਾ ਨੇੜੇ